ਸ਼ਲੋਕ ਮਹੱਲਾ ਤੀਜਾ ਹਉਮੈ ਵਿੱਚ ਜਗ ਮੂਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੇ ਕੇ ਕਰੇ ਅੱਗੇ ਜਾਏ ਹੰਕਾਰ ਦੇ ਵਿੱਚ ਜਗ ਫਸਿਆ ਹੋਇਆ ਹੈ ਮਰਦਾ ਹੀ ਮਰਦਾ ਚੱਲਿਆ ਜਾਂਦਾ ਜੰਮੀ ਜਾਂਦਾ ਠੀਕ ਹੈ ਜੀ ਜਿੱਚਰ ਵਿੱਚ ਦਮ ਹੈ ਠਿੱਚਰ ਦਾ ਚੇਤੇ ਹੀ ਕੇ ਕਰੇ ਅੱਗੇ ਜਾਏ ਉਹ ਅੱਗੇ ਜਾ ਕੇ ਕੀ ਕਰੂਗਾ ਕਮਲਾ ਜਦੋਂ ਜਦੋਂ ਉਹਨੂੰ ਸਾਹ ਚੱਲਦਾ ਉਹਨੂੰ ਚਿੰਤਾ ਕੀਦਾ ਨਹੀਂ ਅੱਗੇ ਜਵਾਬ ਕੀ ਦਊ ਕੀ ਕਰੂਗਾ ਅੱਗੇ ਜਾ ਕੇ ਸਮਝ ਨਹੀਂ ਗੁਆਤਾ ਅੱਗੇ ਉਹ ਕੀ ਜਵਾਬ ਦਊ ਕੀ ਕਹੂਗਾ ਕੀ ਕਰੂਗਾ ਠੀਕ ਹੈ ਜੀ ਗਿਆਨੀ ਹੋਏ ਸੁਚੇਤਨ ਹੋਏ ਅਗਿਆਨੀ ਅੰਧ ਕਮਾਏ ਤੇ ਗਿਆਨੀ ਬੰਦੀ ਰੋਗਿਆਦੀ ਹੋਏ ਆਪਣੇ ਗਿਆਨੀ ਨੇ ਗਿਆਨੀ ਹੋਏ ਤਾਂ ਚੇਤਨ ਹੋਏ ਚੇਤਨ ਹੋਏ ਤਾਂ ਗਿਆਨੀ ਹੋਏ ਕੋਈ ਗੱਲ ਹੋ ਗਈ ਇਦਾਂ ਹਰ ਵਕਤ ਜਾਗਦਾ ਰਹਿੰਦਾ ਚੇਤਨ ਰਹਦਾ ਆਪਣੇ ਕਾਬਤੋਂ ਕਿਸੇ ਕਿਤੇ ਜਲ ਦਿੰਦਾ ਗਿਆਨੀ ਤੋਂ ਇਹਨਾਂ ਟਿੱਪੀ ਲਾਈ ਹੋਈ ਹੈ ਗਿਆਨੀ ਹੋਏ ਸੋ ਚੇਤਨ ਹੋਏ ਹੋਊਗਾ ਚੇਤਨ ਹੋਏ ਹੋਏਗਾ ਇਹ ਜਦ ਚੇਤਨ ਲਾ ਬਤਾਇਆ ਜੇ ਤਾਦ ਦਿਨ ਤੋ ਅੱਛਾ ਜੀ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਈ ਅਗਿਆਨੀ ਅੰਧ ਗੁਰੂ ਕਮਾਈ ਵੀ ਨਹੀਂ ਸੋ ਮਿਲੇ ਅੱਗੇ ਪਾਏ ਜਾਈ ਕਹਿੰਦੇ ਕਹਿੰਦੇ ਜੋ ਇੱਥੇ ਕਮਾਊਗਾ ਉਹੀ ਮਿਲੇਗਾ जो साति को मिला लूगा ऐते साति सब दी लूगा ऐते ओ जाए तेरे आगे पाए जाए आगे जाकर प्राप्ति हो जल्दी लए भाई ये लोग कुछ लेके आए हैं ठीक है जी महल्ला तीजा तुर खसमे का हुक्म पया बिन सतगुरु चेतिया ना जाए सतगुरु मिलया अंतर रब सदा रहया लिव लाई कुकब की ਵੇੜਾ ਸਤਗੁਰ ਜੇ ਤੇਰਲੇ ਜਾਏ ਸਤਗੁਰ ਤੇ ਬਿਨਾਂ ਚੋਤੇ ਨਹੀਂ ਜਾਂਦਾ ਥੱਲੇ ਕੱਤਰਾਂ ਨਾਉਂ ਆਰੋ ਛੜਦੋ ਵਾਲਾ ਬਸ ਬਿਨਾਂ ਪਹਿਲੂ ਵੀ ਪ੍ਰਾਪਤੀ ਨਹੀਂ ਹੁੰਦੀ ਬੱਲ ਨਹੀਂ ਬੰਦਦੇ ਨਹੀਂ ਸੁਣਦੇ ਫਰਬੋਜ਼ਦਰ ਕੇ ਦਾ ਹੋਇਆ ਹੋਇਆ ਹੈ ਫਰਬੋਜ਼ ਦੇਦਰ ਕੇ ਉਹ ਸਤਗੁਰ ਨਾਲੇ ਕੋਪੇ ਕੋ ਗਏ ਪੈਰ ਪੈਟੇ ਇੱਕ ਪੈਰ ਦਾ ਹੱਕ ਤੇ ਚੱਲੂ ਦੂਆ ਪੈਰ ਸਤਗੁਰ ਹੈ ਸਤਗੁਰ ਅੱਗੇ ਚੱਲੂ ਪਿਛਲਾ ਪੈਰ ਪਿੱਛੇ ਚੱਲੂ ਤਾਂ ਗਾਂਵ ਬਰ ਸਕੋਗੇ ਪਹਾੜ ਦੀ ਚੜਾਈ ਚੜੀਏ ਕੋ ਬਜਾਕ ਹੈ ਰਬ ਰਹਾ ਸਦਾ ਰਹਾ ਲਿਵ ਲਾਈ ਜੇ ਸਤਗੁਰ ਕੋਲੇ ਹਲਤਾ ਰਹਾ ਰਹਾ ਉਦਰੇ ਆਵਾਜ਼ ਉਦਰੇ ਹੈ ਦੁਨਿਆ ਤਾਂ ਰਬ ਰਹਾ ਅਜੇ ਨੂੰ ਬੜ ਗਿਆ ਉਹ ਉਹਦੇ ਨਾਲੇ ਲੀਤ ਹੋ ਗਿਆ ਅਦ੍ਰਾਤਬੋਦੀ ਆਵਾਜੇ ਬੜ ਗਿਆ ਰਜਾ ਵਿੱਚ ਚੱਲਣ ਲੱਗ ਗਿਆ ਜਿੱਥੇ ਕਿਰਪਾ ਹੋ ਗਈ ਉਹ ਉਹਦੀ ਰਜਾ ਵਿੱਚ ਹੋ ਗਿਆ ਹੁਕਮ ਹੈ ਉਹਦੇ ਵਿੱਚੇ ਰਹੂ ਉਹਦੇ ਵਰਗੀ ਚੀਜ਼ ਬਾਹਰ ਕੋਈ ਹਰਾ ਦੇਖ ਕੇ ਵੀ ਮੈਂ ਮੇਰੇ ਤਾਂ ਅੰਦਰ ਖਜ਼ਾਨੇ ਈਰੋ ਜਵਾਰਾ ਤਾਂ ਬੇਵਾਰ ਕੌੜੀ ਢੋਲਦਾ ਫਿਰਦਾ ਕੋਈ ਕਬੜਾ ਨਹੀਂ ਤੇ ਹੋਰ ਕੀ ਸੀ ਇਹ ਤਾਂ ਸਾਡੀ ਇੱਜ਼ਤ ਕੀਵੇਂ ਹੋਲੀ ਠੀਕ ਹੈ ਦਮ ਸੰਭਾਲਦਾ ਦਮ ਨਾ ਬਿਰਥਾ ਖੜਦਾ ਹੈ ਕੁਝ ਨਾ ਪ੍ਰਾਪਤੀ ਕਰਦਾ ਹੈ ਇੱਕ ਦਮ ਵੀ ਬਿਰਥਾ ਨਹੀਂ ਜਾਂਦਾ ਤਾਜਦਾਸ ਜੀ ਬਿਰੋਗੋਵਿੰਦ ਫੇਰ ਕਰਦਾ ਇੱਦਾਂ ਜੇ ਪਤਾ ਲੱਗ ਜਾਂਦਾ ਕਿ ਜਨਮ ਮਰਨ ਦਾ ਜੀਵਨ ਪਦਵੀ ਪਾਏ ਜਨਮ ਮਰਨ ਦਾ ਭੌਦ ਨਰੇ ਸੀਗਾ ਜਨੂ ਬਲ ਹੁੰਦਾ ਜਨਮ ਮਰਨ ਦਾ ਭੌਦ ਹੀ ਕਰ ਗਿਆ ਜੀਵਨ ਪਦਵੀ ਪਾਏ ਜੀਵਨ ਪਦਵੀ ਪ੍ਰਾਪਤ ਕਰ ਲਈ ਠੀਕ ਹੈ ਜੀ ਨਾਨਕ ਇਹ ਮਰਤਬਾ ਕਿਸ ਦੇ ਜਿਸ ਨੂੰ ਕਿਰਪਾ ਕਰੇ ਰਜ਼ਾਈ ਜਦ ਕਦ ਹੈ ਵਰਤਵਾ ਜਿਹੜਾ ਹੈਗਾ ਤੇ ਪਦਵੀ ਵਰਤਵਾ ਪਦਵੀ ਨੂੰ ਐਵੇਂ ਲੈ ਲੋ ਇਹ ਪਦਵੀ ਹੋਰੋਂ ਮਿਲਦੀ ਆ ਭਾਈ ਜਿਸ ਤੇ ਕਿਰਪਾ ਕਰੇ ਰਜਾਏ ਜਿਸ ਤੇ ਰਜਾ ਵਾਲਾ ਕਿਰਪਾ ਕਰੇ ਹੈ ਕਿਰਪਾ ਕਰੇ ਉਹ ਮਿਲਦਾ ਹੈ ਹਰੇਕ ਨੂੰ ਨਿਮਰਤਾ ਠੀਕ ਹੈ ਜੀ ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨ ਆਪੇ ਦਾਣਾ ਹੈ ਦਾਨਾ ਦਾ ਬذر ਨਹੀਂ है. ਦਾਨਾ ਆਦਮੀ ਹੋ ਗਿਆ ਦੰਦ ਉਹਨੇ ਦੂਸਰੇ ਨੂੰ ਵੀ ਕੁਝ ਦੱਸ ਸਕਦਾ ਹੈ ਦੰਦ ਉਹ ਹੈ ਜਿਹੜਾ ਦੂਸਰੇ ਨੂੰ ਵੀ ਕੋਈ ਰਾਹ ਹੈ ਜੰਗੇ ਬਾਹਰ ਪਾਸਾ ਦਾਨ ਦੇ ਸਕਦਾ ਹੈ ਦਰਦਾਨ ਇਹ ਪਹਿਲਾਂ ਇਕੱਠਾ ਕੀਤਾ ਗਿਆ ਤਾਜੀ ਦੇ ਸਰਵੇ ਠੀਕ ਹੈ ਜੀ ਆਪੇ ਪ੍ਰਧਾਨ ਆਪੇ ਪ੍ਰਧਾਨ ਉਹ ਬਸ ਪ੍ਰਧਾਨ ਵੀ ਆਪ ਹੀ ਹੈ ਪੰਜ ਪ੍ਰਬੰਧ ਪੰਜ ਪ੍ਰਧਾਨ ਬਣ ਗਿਆ ਰਾਮਨ ਦੇ ਵਿੱਚ ਸ਼ਾਮਲ ਹੋ ਗਿਆ ਪੰਜਾਬ ਵਿੱਚ ਹੋ ਗਿਆ ਪ੍ਰਧਾਨ ਦੇ ਸ਼ਾਮਲ ਹੋ ਗਿਆ ਉਹ ਦੇ ਵਿੱਚ ਸ਼ਾਮਲ ਹੋ ਗਿਆ ਵਿਦੇਸ਼ਕ ਬਣ ਗਿਆ ਠੀਕ ਹੈ ਆਪੇ ਰੂਪ ਦਿਖਾ ਆਪੇ ਲਾਇਏ ਧਿਆਨ ਆਪੇ ਰੂਪ ਦਿਖਾ ਆਪੇ ਲਾਇਏ ਧਿਆਨ ਕਈ ਰੂਪਾਂ ਦੇ ਵਿੱਚ ਦਰਸ਼ਨ ਕਰਉਂਦਾ ਹੈ ਕਈ ਪਰਮਾਨੰਦ ਦੇ ਦੇ ਕੇ ਕਈ ਧੂਪ ਦੇ ਦੇ ਕੇ ਜਿਵੇਂ ਆਪਨੇ ਦਿੱਤੇ ਹੋਏ ਨੇ ਕਦੇ ਸੂਰ ਦਾ ਸਾਦੇ ਚੰਦ ਦਾ ਸਾਦੇ ਤੋਂ ਅਗੇ ਦਾ ਰੂਪਾਂ ਦੇ ਵਿੱਚੋਂ ਦਰਸ਼ਨ ਹੁੰਦਾ ਕੁਦਰਤ ਵਿੱਚੋਂ ਕਦਰ ਦਾ ਦਰਸ਼ਨ ਕਰਉਂਦਾ ਆਪੇ ਲਾਏ ਧਿਆਨ ਆਪੇ ਲਾਏ ਧਿਆਨ ਧਿਆਨ ਜੋੜ ਦਿੰਦਾ ਆਪਣਾ ਧਿਆਨ ਨਾਲ ਜੁੜਿਆ ਹੋਇਆ ਦੂਏ ਦਾ ਵੀ ਧਿਆਨ ਜੋੜ ਲੈਂਦਾ ਠੀਕ ਹੈ ਆਪੇ ਮੌਨੀ ਵਰਤਦਾ ਆਪੇ ਕਥ ਹੈ ਆਪੇ ਕਦੇ ਕਦੇ ਜੁੱਭ ਵੀ ਕਰ ਵਰਤਦਾ ਜਿੱਥੇ ਗਾਂ ਖਦੀ ਉੱਥੇ ਬੋਲੀ ਹੋ ਜਾਂਦਾ ਚੁੱਪ ਹੋ ਬੋਲ ਜਿੱਤੇ ਕੋਈ ਗਾਂ ਖਨੀ ਸ਼ਹਿਰ ਦੀ ਉਹ ਫੇਟੇ ਵਾਸਤੇ ਪਾਰ ਕੋ ਦੀ ਦੀ ਸ਼ਹਿਰ ਦੀ ਗਾਂ ਖਨੀ ਉੱਥੇ ਬੋਲਣੀ ਪੈਣ ਕਾ ਰੂ ਆਪਾਂ ਲੋ ਗੱਲਾਂ ਇੱਕ ਉੱਥੇ ਕਿਉਂ ਪਰੋ ਉੱਥੇ ਮੋਦੀ ਬੜ ਜਾਂਦਾ ਹੈ ਜਿੱਥੇ ਬੋਲੇ ਤੇ ਲਾਭ ਹੈ ਉੱਥੇ ਬੋਲਦਾ ਜਿੱਥੇ ਕਰਦਾ ਠੀਕ ਹੈ ਆ ਕੌੜਾ ਕਿਸੇ ਨਾਲ ਚਾਹੀਦਾ ਨਹੀਂ ਕੌੜਾ ਪਰ ਫਿਰ ਵੀ ਸਾਖਤ ਇੱਥੇ ਤਾਂ ਗੁਰਬਖਸ਼ ਦੀ ਉਹ ਗੱਲ ਹੈ ਇੱਥੇ ਜਿਹੜਾ ਪਿੱਛੇ ਗਿਆ ਉਹ ਵੀ ਹੋ ਜਾਂਦਾ ਮੋਦੀ ਧਾਕ ਹੋ ਜਾਂਦਾ ਕੌੜਾ ਨਾਲ ਲੱਗ ਜੇ ਕਿਸੇ ਨੂੰ ਜਿੱਥੇ ਕੌੜਾ ਲੱਗਦਾ ਲੋਕਾਂ ਨੂੰ ਤੇਰੀ ਬੋਲਦਾ ਜਿੱਥੇ ਗੁਰਬਖਸ਼ ਬੈਠੇ ਨੇ ਸਾਰੇ ਵੀ ਮਿਠਾ ਲੱਗਦਾ ਠੀਕ ਹੈ ਸਭ ਹੀ ਜੇ ਧਿਆਨ ਨਾਲ ਬੋਲਦਾ ਐਸਾ ਮਾਹੌਲ ਬਣਦਾ ਕਿ ਬੋਲਦਾ ਐਸੇ ਬੰਦੇ ਇਕੱਠੇ ਕਰਕੇ ਇਕੱਤਰ ਕਰਕੇ ਬੋਲਦੇ ਜਿੱਥੇ ਸਾਰਿਆਂ ਨੂੰ ਉਹਦੀ ਗੱਲ ਭਾਜ ਵਿੱਚ ਨਹੀਂ ਲੱਗੇ ਠੀਕ ਹੈ ਜੀ ਬੁੱਧਖੋਤਾਂ ਤਾਂ ਆਉਂਦੇ ਬੈਠ ਕੇ ਗੱਲ ਕਰਦੇ ਨੇ ਕਹਿਣ ਦਾ ਮਤਲਬ ਇਹ ਹੈ ਗੁਰਮੁਖ ਐ ਨਾ ਆਪਾ ਫਲਾਂ ਦੇ ਤੋਂ ਬਹਿ ਜਾਂਦੇ ਗੁਰਮੁਖ ਨਾਲੋਂ ਪਰੇ ਇਹਨਾਂ ਨੂੰ ਇਹ ਗੱਲ ਫਿਰ ਟੱਪ ਆਪਸ ਵਿੱਚ ਹੀ ਕਰਦੇ ਉਹ ਆਡ ਹੋ ਕੇ ਆਪਣੀ ਗੱਲ ਬਰਨ ਕੀਤੀ ਜਾਂਦੀ ਇਹ ਜੇ ਗੱਲ ਤੋਂ ਪਰਬੰਧ ਤੇ ਵੱਡੀ ਉਸਤਤਾਂ ਕਿ ਪਰੇ ਹੈ ਇਹ ਇੱਕ ਗੱਲ ਤੇ ਦਾ ਨਹੀਂ ਹੈ ਜੈਸਾ ਹੁੰਦਾ ਹੈ ਹਾਂਜੀ ਪਰਮੇਸ਼ਰ ਵਾਸਤੇ ਗੱਲ ਕਹੀ ਹੈ ਜੀ ਗੁਰੂ ਗੋਬਿੰਦ ਪਰਮੇਸ਼ਰ ਕੋਈ ਉਦਾ ਗੁਰੂ ਗਰਵਰ ਪਰਮੇਸ਼ਰ ਦਾ ਕੋਈ ਠੀਕ ਹੈ ਜੀ ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ